शलोक मोहल्ला पहला पुरियां खंडा सिर करे पिक पैरी तिहाए पावण मार मन जप करे सिर मुंडी तल्ले दे बहुत ही घोर जड़े आदमी तपस्वी हुए ने ना जिन्होंने इस अवस्था ਨੂੰ प्राप्त कीता पीछे उदी हिस्ट्री आई हुई है अपने दशम ग्रंथे दे ए अवस्था सी दत्तात्रेय ਇਹ ਦੱਸਤਾ ਤਾਂ ਨਾ ਪੜੀਏ ਤਾਂ ਇਹ ਗੱਲ ਦਾ ਇੱਕ ਖੁਲਬੀ ਦੀ ਅਸਲ ਦੇ ਵਿੱਚ ਇਹ ਖੱਡਣ ਕੀਤਾ ਹੋਇਆ ਹੈ ਕਿ ਨੂੰ ਆਣਨ ਕੀਤਾ ਹੈ ਪਿੱਛੇ ਕੀ ਸੀ ਇਹ ਦਸਮੇਂ ਰੰ ਤੋਂ ਬਿਨਾਂ ਪਤਾ ਨਹੀਂ ਲੱਗਦਾ ਧਰਮ ਦੀ ਆਪਣੀ ਹਿਸਟਰੀ ਹੁੰਦੀ ਹੈ ਨਾ ਇਹ ਨਾਨਕ ਦੇਵ ਜੀ ਦੇ ਬਾਅਦ ਗੁਰੂ ਗਦ ਹੋਏ ਉਹਨਾਂ ਦੀ ਹਿਸਟਰੀ ਹੈ ਇਤਿਹਾਸੀ ਹੈ ਪਹਿਲਾਂ ਕੁਝ ਹੋਰ ਬੰਦੇ ਸੀ ਉਹ ਇਸ ਕਰਕੇ ਇਹ ਅਵਸਥਾ ਦਿੱਸਾ ਚ ਹੈ ਉਦੋਂ ਜਦੋਂ ਦਸਮੇਂ ਪੜਾਂਗੇ ਉਹਦਾ ਵੀ ਮੈਂ ਕਰੂੰਗਾ ਤਾਂ ਉਹ ਅਵਸਥਾ ਸਾਫ਼ ਔਰ ਇਹ ਹੁਕਮ ਮੰਨਣ ਤੋਂ ਥੱਲੇ ਦੀ ਵਿਵਸਥਾ ਹੈ ਇੰਨਾ ਘੋਰ ਤਪਸਵੀ ਧਾਰਮਿਕ ਆਦਮੀ ਹੁੰਦੇ ਹੋਏ ਵੀ ਉਹ ਉਸ ਰਸਤਾ ਨੂੰ ਨਹੀਂ ਪਹੁੰਚਿਆ ਇਸ ਰਸਤਾ ਨੂੰ ਭਗਤ ਪਹੁੰਚ ਗਏ ਜਿਸ ਰਸਤਾ ਨੂੰ ਘੱਟ ਪਹੁੰਚ ਗਏ ਜਿਸ ਰਸਤਾ ਜਿਹਨਾਂ ਦੀ ਗੁਰਬਾਨੀ ਹੈ ਜਿਸ ਰਸਤਾ ਨੂੰ ਚਾਹੇ ਉਹ ਧਰਮ ਹੈ ਚਾਹੇ ਕੋਈ ਵੀ ਹੈ ਉਹ ਰਸਤਾ ਤੋਂ ਗਿਆਨ ਅਵਸਥਾ ਤੋਂ ਥੱਲੇ ਦੀ ਵਿਵਸਥਾ ਹੈ ਕਿਉਂ ਥੱਲੇ ਦੀ ਵਿਵਸਥਾ ਹੈ ਪੁਰੀਆਂ ਸਾਡਾ ਕਰੇ ਜਿਸ ਆਪਾਂ ਸਰ ਕਹਿੰਦੇ ਆ ਨਾ ਸਰ ਸਤਿਟਲਾਣਾ ਕਹਿੰਦੇ ਆ ਉਹ ਸੈਂਟੀਫਿਕੇਸ਼ਨ ਕਰੇ ਅਪਾਇਲ ਹੱਸ ਲਵੋ ਨੇ ਉਹ ਤੁਸੀਂ ਸਰ ਕਰੇ ਕਹਦੇ ਨੇ ਨਹੀਂ ਇਹ ਪੂਰੀਆਂ ਅਖੰਡਾਂ ਬੋਝ ਸਾਰਿਆਂ ਦਾ ਆਪਣੇ ਲੈ ਲਵੇ ਚਾਹੇ ਉਹਨਾਂ ਦਾ ਸਾਰਿਆਂ ਦਾ ਹੀ ਉਸ ਵੇਲੇ ਧਰਮ ਕਾਗੂ ਪਰ ਜਬੇ ਦਿੱਤਾ ਕਰਦੀ ਸੀ ਜਿਹੜੇ ਦੇਖਦੇ ਸਨ ਨਾ ਦਰਸ਼ਨ ਕਰਦੀ ਸਾਰੇ ਸੋ ਦੋ ਦੇ ਮੱਲੇ ਉੱਪਰ ਚੱਜੇ ਸੀ ਸਾਰੇ ਇਹੋ ਦੇ ਅੱਗੇ ਝੁਕ ਜਾਣ ਬਿਨਾਂ ਹੀ ਕੁਝ ਬੋਲੇ ਬਿਨਾਂ ਹੀ ਸਿਰਫ ਦਰਸ਼ਨ ਕਰਕੇ ਹੀ ਉਹਦਾ ਇੰਨਾ ਪ੍ਰਭਾਵਿਤ ਹੋ ਜਾਣ ਉਹ ਜਿੱਤੇ ਜਾਣ ਇੰਨੀ ਉਹ ਦੀ ਵਿਵਸਥਾ ਉੱਚੀ ਹੋਵੇ। ਮਾਇਆ ਵਿੱਚ ਉਦਾਸੀ ਵਾਲੀ ਵਿਵਸਥਾ ਲੱਗੂ ਹੋਵੇ। ਕਿਆ ਤੋਂ ਸਖਣਾ ਹੋਵੇ। ਹਾਂਜੀ। ਇੱਕ ਪੈਰੀ ਧਿਆਏ, ਇੱਕ ਮਨ ਇੱਕ ਚਿਤ ਹੋਇਆ ਰਹੇ। ਧਿਆਵੇ, ਧਿਆਨ ਕਰੇ ਕਾਦੇ ਕਿ ਬਿਦੂਕ ਕੀ ਪਰਮੇਸ਼ਰ ਦਾਜਾਲ ਹੁੰਦਾ ਰਹੇ। ਉਹ ਕੀ ਚੀਜ਼ ਪਰ ਬਾਹਰ ਮੁਖੀ ਹੈ। ਬਾਹਰੋਂ ਦੇਖਦਾ ਵੀ ਆਕਾਸ਼ ਦੇਖ ਰਿਹਾ, ਵੀ ਉਹ ਕੀ ਹੈ? ਆਪਣੀ ਬੁੱਧੀ ਦੇ ਲੈਵਲ ਤੇ ਸਮਝਣ ਦੀ ਕੋਸ਼ਿਸ਼ ਕਰ ਰਹੇ ਕੁਝ ਅੰਦਾਜ਼ਾ ਲਾ ਰਿਹਾ ਕਿਹਾ ਜਾਂਦਾ ਹੈ ਅੰਦਾਜ਼ਾ ਅੰਦਾਜ਼ਾ ਨਹੀਂ ਲੱਗਦਾ ਮੇਰਾ ਅੰਦਾਜ਼ਾ ਦੀ ਹੋ ਗਏ ਧਿਆਨਤ ਰੇ ਫਿਰ ਜਿੰਦੀ ਕੋਸ਼ਿਸ਼ ਕਰੇ ਆਪਣੇ ਆਪ ਦੇ ਬਗੈਰ ਉਪਦੇਸ਼ ਤੇ ਆ ਗੁਰਬਾਣੀ ਦਾ ਉਪਦੇਸ਼ ਆਮਲੇ ਉਲੁਕਤੋਂ ਆਪਣੇ ਲੈਵਲ ਤੇ ਆਪਣੀ ਬੁੱਧੀ ਦੇ ਲੈਵਲ ਤੇ ਹੀ ਕੋਸ਼ਿਸ਼ ਕਰਨੀ ਪਰਮੇਸ਼ਰ ਪ੍ਰਭੂਤਮ ਉਹ ਦੀ ਉਹ ਕੀ ਕੀ ਹੋਈ ਫਿਰ ਠੀਕ ਹੈ ਇਹ ਜਿਹਾਂ ਦਾ ਜੀ ਲਾ ਕੇ ਇਹ ਜਿਹੜੇ ਬੱਤਾ ਬਣ ਜਾਂਦੇ ਨੇ ਨਾ ਇਸ ਦੇ ਲੋਕਾਂ ਹਾਂਜੀ ਉਹਨਾਂ ਦੇ ਅਰਥ ਇਸ ਤਰ੍ਹਾਂ ਹੈ ਜੀ ਜੇ ਕੋਈ ਮਨੁੱਖ ਸਿਰ ਧਰਨੇ ਹੋ ਕੇ ਸਾਰੀਆਂ ਧਰਤੀਆਂ ਤੇ ਧਰਤੀ ਦੇ ਸਾਰੇ ਹਿੱਸਿਆਂ ਤੇ ਫਿਰੇ ਜੇ ਇੱਕ ਪੈਰ ਦੇ ਭਾਰ ਖਲੋ ਕੇ ਧਿਆਨ ਤਰੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਤੇ ਫਿਰ ਥੱਲੇ ਇਲਾਕੇ ਦਾ ਪੁੱਬੇ ਦੀ ਸਰ ਦਾ ਦੋ ਪੈਰਾਂ ਤੇ ਬਿਨਾਂ ਦਾਦੀ ਚੋਰੇ ਦੀ ਗੱਲ ਉਹ ਸਿਰ ਕਰੇ ਦਾ ਮਤਲਬ ਜਿਤਨਾ ਨਹੀਂ ਸਮਝਦੇ ਹਮੈ ਸਭ ਜੀ ਤੁਹਾਡੀ ਗੱਲ ਠੀਕ ਹੈ ਜੀ ਕਰੇ ਨੂੰ ਫਿਰ ਅਰਥ ਲਾ ਲਿਆ ਉਹ ਪੈਰੀ ਤੋਂ ਪਰੇਖਾ ਖਾਨ ਨੇ ਨੂੰ ਤਾਰਕ ਦਾ ਗਿਆਨ ਉਹਨਾਂ ਨੂੰ ਧਾਰਨ ਦੀ ਜ਼ਿੰਮੇਵਾਰੀ ਹੈ ਸਾਗਰ ਦੇ ਉੱਤੇ ਦੇਣ ਦੀ ਜ਼ਿੰਮੇਵਾਰੀ ਧਰਮ ਦੀ ਜ਼ਿੰਮੇਵਾਰੀ ਆਪਣੇ ਝੰਮੇ ਲੈ ਲਵੇ ਇਹ ਘਰ ਹੋ ਸਕਦਾ ਨਹੀਂ ਆਪਣੇ ਝੰਮੇ ਲੈ ਲਵੇ ਇਸ ਅਵਸਥਾ ਦੇ ਵਿੱਚੇ ਧਰਮ ਬਣੇ ਦੇ ਕਿਵੇਂ ਕੁਰਾਨ ਲਿਖੀ ਗਈ ਸਨਾਤਨ ਸਨਾਤਨ ਬਸ ਕਾਮਯਾਬ ਹੋਈ ਹੈ ਚਾਰਸੀ ਵੈਸੇ ਬ੍ਰਹਮਾ ਦੇ ਇਕੇਲੇ ਫਤ ਸਲੁੱਦਨ ਫਤ ਕਮਾਲ ਤੇ ਸਨਾਤਨ ਸਨਾਤਨ ਦੀ ਮਤਲਬ ਹੋਈ ਹੈ ਜਦੋਂ ਤਾ ਹੈ ਜਰੂਰ ਪਤੋਂ ਬਹੁਤੀ ਨਹੀਂ ਹਾਂਜੀ ਕਰੇ ਸਿਰ ਮੁੰਡੀ ਤੱਲੇ ਸਿਰ ਦੇ ਭਾਰ ਖੜਾ ਹੋਵੇ ਪੁੱਠਾ ਉਹ ਸਿਰ ਪਾਣੇ ਹੋਵੇ ਜਪ ਕਰਦੇ ਨੇ ਕਿਉਂਕਿ ਦੇਖੇ ਨੇ ਦੇਖੇ ਜਾਂਦੇ ਨੇ ਹੁਣੇ ਕੌਣ ਦਾ ਮਤਲਬ ਵੀ ਇੱਥੇ ਮੰਨੂ ਤਾਰ ਲਈਏ ਕੌਣ ਮਾਰ ਪੈਸਾ ਰੋਕ ਕੇ ਕਹਿ ਸਕਦੇ ਨੇ ਉਹ ਸਾਰੋ ਕਰਨ ਲੱਗੇ ਗੱਲਬਾਤ ਦੀ ਆ ਰੋਕ ਲੈਣ ਨਾਲ ਬਹੁਤ ਦੇਰ ਫਿਰ ਕਦਮ ਛੱਡਦੇ ਨੇ ਹੈਗਾ ਉਹ ਨੂੰ ਕੌਣ ਮਾਰ ਕੌਣ ਦਾ ਅਰਥ ਉਹਨਾਂ ਨੇ ਹਵਾਲਾ ਲੈ ਕਿ ਨੂੰ ਰੋਕ ਕੇ ਜਪ ਕਰੇ ਜੱਪੇ ਬੁੱਲ ਅੰਦਰ ਜਪ ਕਰੇ ਐਂਦੀ ਬਾਇਆ ਤੋਂ ਜੇ ਫੁਰਨਾ ਜੋ ਮਜ਼ਦੂਰ ਰੋਕ ਕੇ ਬਾਹਰ ਫੁਰਨੇ ਉੱਥਾਂ ਤੇ ਰੋਕ ਕੇ ਬੁੱਲ ਤੇ ਅੰਦਰ ਜੱਪ ਵੀ ਕਰੇ ਕਿਸੇ ਲਫਜ਼ ਦਾ ਜਪ ਕਰ ਲੱਗ ਜਾਂਦੇ ਨੇ ਕੋਈ ਯਾਦ ਕਰਦਾ ਰਹੇ ਲਗਾਤਾਰ ਸਿਰ ਪਰ ਖੜੇ ਸਿਰ ਪਰ ਹੋ ਕੇ ਹਾਂਜੀ ਸਿਰ ਮੁੰਡੀ ਮੁੰਡੀ ਮੁੰਡੀ ਤਾ ਨਾ ਸਿਰ ਜਿਹੜਾ ਹੈਗਾ ਕਹਿੰਦੇ ਨੇ ਬੰਤੀ ਜਾਂ ਸਿਰ ਸੋਪੀਆ ਬੁੱਢੀ ਆ ਜਿਹੜਾ ਸਰੀਰ ਆਲਾ ਸਿਰ ਹੈ ਇਹਦੇ ਨਾਲ ਮੁੰਡੀ ਲੱਗਿਆ ਜਿਹੜਾ ਪੰਜ ਪ੍ਰੂਤਕ ਸਰੀਰ ਆਲਾ ਆਪਾਂ ਸੱਲਾਂ ਤੋਂ ਨਾਲ ਇਹਨੇ ਮੁੰਡੀ ਲੱਗੂਗਾ ਤੇ ਕੱਲਾ ਇਹ ਸਿਰ ਕਹਾ ਫਿਰ ਦੂਆ ਲੱਗੂਗਾ ਫਿਰ ਉਹਦਾ ਹਸਮਨ ਲੱਗੂਗਾ ਬੰਤੀ ਸਿਰ ਸੋਪੀਆ ਉਹ ਤੇੜਾ ਹੀ ਸਤਗੁਰ ਦੇ ਪਾਲਛੇ ਦਿਨ ਠੀਕ ਹੈ ਪਰ ਇਹ ਬਾਹਰਲੇ ਸਿਰ ਦੀ ਗੱਲ ਹੈ ਹਾਂ ਜੀ ਤਾਂ ਕਿ ਗੁੱਡ ਖੁੱਡ ਜੁਦਾ ਕਰ ਕੇ ਅਬ ਦੇ ਦੋ ਕੀ ਸਾਹ ਨੂੰ ਰੁੱਕੇ ਤੇ ਕੋਈ ਅੰਦਰ ਜਾਪ ਕਰੇ ਹਾਂ ਬਨੁਦਰ ਜਾਪ ਕਰੇ ਐਡੀ ਕੋ ਪੁਤਲਾ ਹੋ ਕਰੇ ਹਾਂ ਪਰ ਉਹ ਟਿਕ ਟਿਕ ਹੈ ਕਿਸ ਨੂੰ ਜ਼ੋਰ ਕਰੇ ਪਰ ਇਹ ਬੰਦ ਦੱਸੋ ਉਹ ਕਹਿੰਦੇ ਜਿਹੜਾ ਮਨ ਉਹ ਨਾ ਟਿਕੂ ਆਸਰੇ ਟਿਕੂਗਾ ਤੇ ਸ਼ਕਤੀ ਹੈ ਜਿਹਨਾਂ ਨਾਲ ਮਨ ਰੋਕੂਗਾ ਮਨ ਤਰੁਖਾ ਤੇ ਕਿਹੜੀ ਚੀਜ਼ ਨੂੰ ਤੇਕ ਬਣਾਊਗਾ ਕੌਣਾ ਤਾਂ ਬੰਦ ਸੀ ਤੇ ਕਾ ਲਿਆ ਸਿਰ ਤੁਸੀਂ ਧਰਤੀ ਤੇ ਹਾਂਜੀ ਕਿਸ ਜ਼ੋਰ ਕਰੇ ਕਿਹਨੂੰ ਸ਼ਕਤੀ ਬਣਾਊਗਾ ਜਿਹੜੀ ਮਨ ਰੋਕੂਗੀ ਹਾਂਜੀ ਕਿਸ ਨੂੰ ਕਹੀਏ ਨਾਨਕਾ ਕ੍ਰਿਸ਼ਨੂ ਕਰਤਾ ਦੇ ਹਨ ਕਹਣਾ ਕਿ ਨੂੰ ਐ ਦਸੀਏ ਗੱਲ ਇਹ ਤਾਂ ਕਰਤੇ ਹੱਥ ਵੜਿਆਈਆਂ ਚਾਹੇ ਭਾਵੇਂ ਸਦੇ ਇੱਕ ਹੀ ਹੁਣ ਉਹ ਤਾਂ ਆਪਣੀ ਮਰਜ਼ੀ ਕਰੀ ਜਾਂਦਾ ਉਹ ਕਹੜਾ ਕਹਿੰਦੀ ਸੁਣਦਾ ਉਹ ਤਾਂ ਮੰਨਦਾ ਹੀ ਨਹੀਂ ਕਿ ਉਹ ਤਾਂ ਇਹ ਕਹੂੰ ਗਾ ਰਿਹਾ ਕਹੀਏ ਕਿ ਨੂੰ ਕਹੀਏ ਨਾਨਕਾ ਕਿ ਇਹ ਤਾਂ ਕਰਤੇ ਹੱਥ ਵੜਿਆਈਆਂ ਤੂੰ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦਾ ਆਪਣੀ ਜਤਨ ਨਾਲ ਨਹੀਂ ਲੈ ਸਕਦਾ ਤੂੰ ਤਾਂ ਜਤਨ ਕਰ ਰਹਿਣਾ ਸਰਪਲ ਨੇ ਸਭ ਜਤਨ ਹੈ ਜਤਨ ਨਾਲ ਨਹੀਂ ਛੁਟਦਾ ਹੈ ਛੁਟਕਾਰਾ ਹੈ ਛੁਟਕਾਰਾ ਕਿਰਪਾ ਨਾਲ ਹੈ ਉਹਦੀ ਕਿਰਪਾ ਹਾਸਲ ਕਿਵੇਂ ਕਰ ਲਈਏ ਇਹ ਵੀਡੀ ਸੀ ਕਿਰਪਾਲੁਕ ਹੈ ਉਹ ਪਰ ਕਿਰਪਾ ਕਿਵੇਂ ਕਰੂਗਾ ਤੇਰੇ ਤੇ ਇਹਦਾ ਗਿਆਨ ਲੈਣਾ ਸੀ ਅੱਗੇ ਤਾਂ ਜਵਾਬ ਹੈ ਜਵਾਬ ਦੇ ਤ ਹੁਕਮੀ ਰਹਾਏ ਆਪਣੈ ਮੂਰਖ ਆਪ ਗਣੇ ਜੇ ਆਪਣੈ ਭਾਵੇਂ ਚੱਲਦਾ ਉਹ ਜਦੋਂ ਅਚਰ ਜਿਵੇਂ ਗੁੱਡੀ ਥੱਲੇ ਕਰਕੇ ਉੱਤੇ ਸਿਰ ਤਾਂ ਕਰਕੇ ਕਰਦਾ ਜਾਪ ਕਰਦਾ ਆਪਣੀ ਮਰਜ਼ੀ ਦਾ ਗੁਰਬਾਣੀ ਦਾ ਜਿਹੜਾ ਧੁਰਪੀ ਬਾਣੀ ਹੈ ਉਹਦੇ ਅਨੁਸਾਰ ਨਹੀਂ ਕੰਮ ਕਰ ਰਿਹਾ ਧਰਮ ਤਾਲਨ ਕੀਤਾ ਮਨ ਵਰਜੀ ਦਾ ਧਰਮ ਤਾਲਨ ਕੀਤਾ ਤਾਂ ਫਿਰ ਮੂਰਖ ਹੈ ਉਹ ਜਦ ਕਹਿੰਦਾ ਮੈਂ ਸਿਰ ਥੱਲੇ ਕੀਤਾ ਹੋਇਆ ਮਨ ਨੂੰ ਸਿਰ ਬਣਾ ਲਿਆ ਤਾਂ ਆਪਣੀ ਮਰਜ਼ੀ ਦੇ ਅਰਥ ਦੇਣਾ ਫਿਰ ਕੱਲ੍ਹ ਸੀ ਮਨੂ ਕਾਬੂ ਲਿਆ ਸਿਰ ਕਾਬੂ ਕੱਲ੍ਹ ਸੀ ਮਨ ਉਲਟਾ ਕਰ ਲਿਆ ਸਿਰ ਉਲਟਾ ਸਰੀਰ ਬਹਾਰਲਾ ਦਾ ਪਲਟਾ ਲਿਆ ਮਰਦੀ ਪਲਟਾਇਆ ਉਹ ਨਾજર ਮੂਰਖੇ ਐ ਉਹ ਅਰਥਾਂ ਦੇ ਅੰਤ ਕਰਕੇ ਬਾਹਰਲੇ ਸਰੀਰ ਤੇ ਲੈ ਗਿਆ ਗੱਲ ਹੋਜੀ ਮਹੱਲਾ ਪਹਿਲਾ ਹੈ ਹੈ ਆਖਾਂ ਕੋਟ ਕੋਟ ਕੋਟੀ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਿਣ ਨਾ ਆਵੇ ਤੋਟ ਸੋ ਆ ਮੈਂ ਕਹਾ ਮੈਂ ਮੰਦਾ ਵੀ ਪਰਮੇਸ਼ਰ ਹੈਗਾ ਹੈਗਾ ਹੈਗਾ ਕਰੋੜਾਂ ਬਾਹਰ ਆਖੋ ਕੋਈ ਗੱਲ ਨਹੀਂ ਕਰੋੜਾਂ ਦੇ ਵੀ ਕਰੋੜਾਂ ਦਾ ਰੱਖੀ ਜਾਵਾਂ ਕਿਹੜਾ ਘਾਟਾ ਪੈਂਦਾ ਜਿੰਨਾ ਚਿਰ ਵਰਜੀ ਕਹੀ ਜਾਵੋ ਚਾਹ ਚਾਰੇ ਜੁਗ ਦੀ ਉਮਰ ਬਣ ਕੇ ਕਹੀ ਜਾਵੇ ਹੈਗਾ ਹੈਗਾ ਕੀ ਫਰਕ ਪੈਂਦਾ ਜਨਮ ਆਖੂ ਆਕਾਸ਼ ਸਦਾ ਸਦਾ ਸਦਾ ਕਹਿਣਾ ਰਿਹਾ ਹੇ ਜੋ ਕਹਿਣਾ ਆਵੇ ਟੋਟ ਕਹਿਣ ਦਾ ਕੋਈ ਟੋਟਾ ਨਹੀਂ ਹੁੰਦਾ ਇਵੇਂ ਜੇ ਨਾਮ ਜਪਦੇ ਨੇ ਜਿਹੜਾ ਅੱਖਰ ਇੱਕ ਬੰਦ ਕੇ ਉਹਦੀ ਗੱਲ ਹੈ ਕੋਈ ਰਾਮ ਬੰਦ ਕੇ ਕੋਈ ਕ੍ਰਿਸ਼ਨ ਬੰਦ ਕੇ ਕੋਈ ਵਾਸਦੇਵ ਬੰਦ ਕੇ ਉਹ ਉਚਾਰਣ ਕੀ ਜਾਂਦੇ ਨੇ ਵੀ ਆਊਗਾ ਉਹ ਹੈ ਮੰਨ ਕੇ ਵੀ ਦਰਸ਼ਨ ਦੇਊਗਾ ਐ ਉਹਦਾ ਨਾਂ ਚੁੱਕੀ ਜਾਈਏ ਜਿੰਨਾ ਚਿਰ ਮਰਦੇ ਜਾਵੋ ਜਿਹੜੀ ਉਮਰ ਹੈ ਕੋਈ ਤੋਟਾ ਨਹੀਂ ਆਉਂਦਾ ਇਹਦੇ ਚ ਘਾਟਾ ਕੀ ਹੋਣਾ ਬੋਲੀ ਜਾਣੇ ਤੁਸੀਂ ਹਾਂਜੀ ਭਣੇ ਲੋਕ ਜਿਹੜੇ ਸਤਨਾਮ ਵਾਹਿਗੁਰੂ ਕਹਿੰਦੇ ਉਹ ਵੀ ਵਿੱਚ ਆ ਜੰਨੇ ਜੀ ਵਿੱਚੇ ਆਉਣਗੇ ਫਿਰ ਉਹਨਾਂ ਨੇ ਪਿਛਲਿਆਂ ਦੀ ਉਹਨਾਂ ਗੱਲ ਕੀਤੀ ਲਫ਼ਜ਼ੇ ਬਦਲਿਆ ਕੱਲ੍ਹ ਤਾਂ ਪਿਛਲੀ ਹੋਈ ਹੈ ਲਫ਼ਜ਼ੇ ਬਦਲ ਲਿਆ ਸਿਧਾਂਤ ਤਾਂ ਉਹੀ ਰਿਹਾ ਰਾਤ ਤਾਂ ਹੈ ਹਾਂਜੀ ਨਾ ਹੋ ਥੱਕਾਂ ਨਾ ਠਾਕੀਆਂ ਏਵਡ ਰੱਖੈ ਜੋਤ ਨਾਨਕ ਚਸਿਓ ਚੁਖ ਬਿੰਦ ਉਪਰ ਆਖਣ ਦੋਸ਼ ਨਾ ਥਕਾ ਨਾ ਤਾਂ ਮੈਂ ਥਕਾਂਗਾ ਨਾ ਤਾਂ ਕੋਈ ਜੰਬ ਨਾ ਠਾਕੀਆਂ ਤਾਂ ਕੋਈ ਮੈਨੂੰ ਰੋਕ ਸਕਦੇ ਵੀ ਭਾਈ ਤਾਂ ਆਖਿਆਂ ਤੇ ਕੁਝ ਵੀ ਫਰਕ ਪੈਣਾ ਬਿਨੂੰ ਕੋਈ ਸਮਝਾ ਸਕੇ ਜੇ ਸਮਝਾਉਣ ਵਾਲਾ ਉਹ ਮੈਂ ਰੋਕਿਆ ਰੁਕਾ ਵੀ ਦੋ ਜੋਤ ਇੱਡੀ ਬਣੀ ਅਕਲ ਹੋਵੇ ਬਿਨ ਸੁਖੀ ਸੁਖਾਇ ਨਾ ਸਕੇ ਕਿਉਂਕਿ ਉਹਨਾਂ ਦੇ ਲੋਕਾਂ ਦੇ ਦਰ ਬਣਾ ਨੇ ਉਸ ਵੇਲੇ ਗੁਦਵਾਨ ਸੀ ਉਸ ਵੇਲੇ ਕੋਈ ਗੁਰਮਖੀ ਦੀ ਸੀ ਜਦੋਂ ਮੱਤਾ ਪ੍ਰਚਲਤ ਹੋਈ ਜਾਂਦੇ ਪੁਰਵਤਾਂ ਬਾਦ ਦੇ ਵਿੱਚ ਗੁਰਮਖ ਪਰਗਟ ਹੋ ਗਏ ਮੱਤਾ ਨੂੰ ਖਡਣ ਕਰਦੇ ਨੇ ਉਸ ਵੇਲੇ ਉਹੀ ਮੱਤਾ ਪ੍ਰਧਾਨ ਹੋਦੀ ਹੈ ਜਦੋਂ ਪ੍ਰਚਲਤ ਹੁੰਦੀ ਹੈ ਇੱਡੀ ਬੜੀ ਮੈਰੀ ਗੁੱਧ ਹੋਵੇ ਕਹੇ ਮੈਨੂੰ ਕੋਈ ਰੋਕਣ ਵਾਲਾ ਨਹੀਂ ਉਹ ਭਾਈ ਗੱਲ ਇਹ ਗਲਤ ਹੈ ਇੱਡੀ ਠੀਕ ਹੈ ਇੱਡੀ ਜੋਤ ਮੇਰੇ ਜੀ ਇੱਡੀ ਬੁੱਧਵਾਲ ਐਨਾ ਹੋਵੇ। ਨਾਨਕ ਚਸਿਓ ਚੁੱਕ ਬਿੰਦ ਚਸਾ ਤੇ ਚਸੇ ਤੋਂ ਵੀ ਘੱਟ ਚੁੱਕ ਬਿੰਦ ਥੋੜਾ ਟਾਈਮ ਉੱਪਰ ਆਖੜ ਦੋਸ ਇਹਦੇ 'ਚ ਦੋਸ ਹੈ ਚਾਹੇ ਤੁਸੀਂ ਇੱਕ ਸੈਕਿੰਡ ਤੇ ਕਹਿ ਲੋ ਚਾਹੇ 100 ਹਜ਼ਾਰ ਕਰੋੜ ਸਾਲ ਵਾਸਤੇ ਕਹਿ ਲਓ ਇਹ 'ਚੋ ਕੁਝ ਲੱਭਣ ਵਾਲੀ ਚੀਜ਼ ਵੀ ਹੈ। ਇਹਦਾ ਫਲ ਕੋਈ ਨਹੀਂ ਚਾਹੇ ਥੋੜਾ ਜਿਹਾ ਕਹਿ ਲੋ ਚਾਹੇ ਤੁਸੀਂ ਬਹੁਤਾ ਛਿਰ ਕਹਿ ਲੋ ਜੱਸਿਆਂ ਚੁਖ ਮਿੱਤਰ ਦਾ ਮਤਲਬ ਹੈ ਜੱਸਾ ਜੱਸਾ ਹੁੰਦਾ ਨਾ ਜੱਸਾ ਕਿਸੇ ਕਾਇਮ ਦਾ ਹਿੱਸਾ ਹੁੰਦਾ ਬਿਲਡ ਹੋਵੇ ਸਕਿਲਡ ਪਰ ਕਾ ਲੋ ਬਿਲਡ ਨੂੰ ਜਾਪ ਤੱਕ ਕਰ ਲੋ ਇਹ ਦੋ ਸੇ ਇਹ ਅਕਲ ਦੀ ਗੱਲ ਨਹੀਂ ਹੈ ਇਹ ਚ ਪ੍ਰਾਪਤੀ ਕੁਛ ਨਹੀਂ ਹੈ ਹਾਂਜੀ ਠੀਕ ਹੈ ਜੀ ਇਹ ਗੁਰਮਤਿ ਭਗਤੀ ਨਹੀਂ ਭਾਵ ਇਤੋ ਰੁਪਿਆ ਆ ਤੂੰ ਜਾਣਦੀ ਪਰ ਆਪੀ ਨਹੀਂ ਹੋ ਸਕਦੀ ਇਹ ਤੋੜੀ ਹਾਂਜੀ ਪੌੜੀ ਨਾਏ ਮੰਨੀਏ ਕੁਲ ਉਧਰੈ ਸਭ ਕੁਟੰਬ ਸਬਾਇਆ ਨਾਏ ਮੰਨੀਏ ਸੰਗੀਤ ਉਧਰੈ ਜਿਨ ਰਿਦੇ ਵਸਾਇਆ ਹਾਂਜੀ ਨਾ ਫੇ ਨਾਏ ਪਿਛਲੀ ਪੌੜੀ ਵਾਲੀ ਉਹ ਗੱਲ ਹਾਂਜੀ ਉਪਰ ਦੱਸਦਾ ਨਾਮ ਨੂੰ ਰਬ ਵਾਲੇ ਉਸ ਵੇੜੇ ਵੇਦ ਹੈ ਵੇਦ ਹੈ ਪਰ ਮਤ ਜਲਾਲੀ ਦੇਹ ਦੀ ਮੱਤ ਤਿਆਰਤੀ, ਦੇਹ ਵਾਲੀ ਮੱਤ ਤਿਆਰ ਕਰੇ, ਗੁਰਬਾਣੀ ਵਾਲੀ ਮੱਤ ਤਿਆਰ ਕਰੇ, ਦੂਜੀ ਮੱਤ ਲੈ ਲਈ ਜਿਵੇਂ ਹੁਣ ਅ ਦੂਜੇ ਟੀਕੇ ਪ੍ਰਚਲਿਤ ਹੋ ਗਏ, ਟੀਕੇ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਮੰਨਦੇ ਨਹੀਂ। ਗੁਰਬਾਣੀ ਦੇ ਸਹੀ ਅਰਥਾਂ ਕੇ ਤੱਕ ਨਹੀਂ ਮੰਨਦੇ। ਪਾਣਾ ਕੀ ਹੈ, ਨਾਮ ਕੀ ਹੈ ਵਿਆਖਿਆ ਹੋ ਗਈ ਨਹੀਂ ਮੰਨਦੇ। ਇਹ ਨਾਮ ਨੂੰ ਮੁਦਰਤੇ ਬਿਨਾ ਉਹ ਹਠਯੋਗ ਥਿਆ ਦੇਣਾ, ਹਠਯੋਗੀ ਹੋਗੇ। ਨਾ ਇਹ ਬੰਦੀਏ ਕੋਲ ਉਧਰ ਹੈ ਨਾਮ ਨੂੰ ਪਾਣੇ ਨੂੰ ਗੁਰਲ ਨਾਲੇ ਕੋਲ ਦਾ ਆਧਾਰ ਹੋਣਾ ਸਾਰੀ ਦਾ ਸਾਰੇ ਗੁਰਸਿੱਖ ਦੇ ਜਿੱਦੇ ਗੁਰਸਿੱਖ ਆ ਗੁਰਮੁਖੀ ਭਗਤੀ ਵਾਲੇ ਨੇ ਉਹਨਾਂ ਨੂੰ ਹੁਕਮ ਪਾਣਾਂ ਆਉਣ ਵਾਲੀ ਸਾਰਿਆਂ ਦੇ ਭਲਾ ਹੋਣਾ ਤਾਂ ਕਰੂਗਾ ਸਾਰਾ ਕਿਉਂਕਿ ਨਾ ਨਹੀਂ ਚੱਲਣਾ ਸਾਡੇ ਸਾਡੇ ਵੀ ਸਾਡੇ ਉਹ ਕਰਨ ਲੱਗੇ ਨਾ ਮੰਨਿਆ ਸੰਤ ਉਧਰ ਸਾਰੀ ਸੱਦ ਇਕੱਠੀ ਉਹਦਾ ਨਾਮ ਗਿਆਨ ਨਾਲੇ ਹੋ ਸਕਦਾ ਕੋ ਗਿਆਨ ਦੀ ਕਿ ਸ਼ਕਤੀ ਹੈ ਜਿਹਦੇ ਨਾਲ ਗਿਆਨ ਖਵੱਦ ਦਾ ਬੋਲਦਾ ਹੈ। ਹੋਰ ਕੋਈ ਸ਼ਕਤੀ ਨਹੀਂ ਉੱਪਰ ਆਇਆ ਨਾ ਕਿਹੜੀ ਸ਼ਕਤੀ ਰਿਆਸੜੇ ਮਨ ਖੜੂਗਾ। ਸ਼ਕਤੀ ਗਿਆਨ ਤੋਂ ਬਿਨਾ ਖੜੇ ਨਹੀਂ ਸਕਦਾ। ਬੁੱਧ ਬਲ ਤੇ ਬਿਨਾ ਬੰਦੀ ਦੇ ਵਿੱਚ ਬਲ ਨਹੀਂ ਨਾ ਹੁੰਦਾ ਪੂਰਾ ਬੁੱਧ ਬਲਵਾਨ ਦੀ ਹੁੰਦੀ ਬੰਦੂ ਰੋਕਣ ਵਾਲੀ। ਜਿੱਦ ਹੀ ਰੁਕਦਾ। ਜਿੱਦ ਬੁੱਧ ਬਲਵਾਨ ਹੁੰਦੀ ਚੜੀਏ ਹੋਰ ਨਾ ਮਨ ਜਿੱਥੇ ਆਉਂਦਾ ਚਲਾ ਜਾਊਗਾ ਬਲ ਤੇ ਵਿੱਚ। ਜਾਂ ਤਾਂ ਗਿਆਨ ਉਹ ਜੂਗਾ ਨੇੜੇ ਚਲੇ ਜਾਊਗਾ ਮਨ ਆਪੇ ਰੁਕ ਜਾਊਗਾ ਆਪੇ ਗਿਆਨ ਦਾ ਬਦਾਰ ਬੁੱਲ ਹੈ ਸੰਤ ਤਾਂ ਉਧਰ ਹੈ ਜਿਹਨੂੰ ਰਿਤੇ ਫਸਾਇਆ ਸੰਤ ਦੇ ਵਿੱਚ ਜਿਹਨਾਂ ਨੇ ਹਿਰਦੇ ਵਿੱਚ ਵਸਾ ਲਈ ਇਹ ਗੱਲ ਗੁਰਮੱਦੀ ਪਾਣਾ ਬੁੱਲਦੀ ਉਧਾਰ ਹੋਦਾ ਹੀ ਹੋਂਦੇ ਪਾਈ ਸੰਤ ਦੇ ਵਿੱਚ ਗਏ ਤੇ ਉਹਦਾ ਹਾਲ ਨਹੀਂ ਹੁਣ ਜਿਕਰ ਸਭ ਸਭ ਕਰਕੇ ਆਏ ਆ ਜੀ ਹਰੇ ਕੇ ਕਹਿ ਦਿੰਦਾ ਉਹ ਪਾਈ ਜੇ ਗੱਲ ਮੱਦੀ ਦੀ ਉਹ ਉਧਾਰ ਮੰਦੇ ਤਾਂ ਹੀ ਹੁਣ ਸਾਰੇ ਮੰਨ ਲੈਣਗੇ ਸਾਰਿਆਂ ਦਾ ਉਧਾਰ ਹੋਊ ਜਿਹੜਾ ਮੰਨ ਲੂਗਾ ਉਹਦਾ ਉਧਾਰ ਹੋਊ ਜੀ ਨਾਇ ਮੰਨਿਏ ਸੁਣ ਉਦਰੇ ਜਿਨ ਰਸਨ ਰਸਾਇਆ ਨਾਏ ਮੰਨਿਏ ਦੁਖ ਭੁਖ ਗਈ ਜਿਨ ਨਾਮੀ ਮੀ ਚਿਤ ਲਾਇਆ ਪਾਲਾ ਮੰਨੇ ਤੋਈ ਇਹ ਸੁਣੇ ਤੋ ਪਹਿਲਾ ਸੁੜਦਾ ਹੈ ਸੁਣ ਤੋ ਬੁੱਝਦਾ ਹੈ ਸੁਣਿਆ ਬੰਦਿਆੁਰ ਕੀਤਾ ਪਉ ਤਾਂ ਹੀ ਬੰਦੂ ਨਾਇ ਮੰਨਿਏ ਸੁੜੀਏ ਚਾਹ ਪਹਿਲਾ ਸੁੜੀਏ ਸੁੜ ਕੇ ਬੰਨ ਲੀਏ ਫਿਰ ਬੁੱਝਦੇ ਹੀ ਚਲੇ ਜਾਈਏ ਜਿੰਨਾ ਚਿਰ ਬੰਨਦ ਹੈ ਉਹਨਾ ਚਿਰ ਬੰਨਾ ਹੈ ਬਾਲਕ ਠਾਕ ਨਾ ਪਾਏ ਰਸਤੇ 'ਚ ਕੋਈ ਰੁਕਾਵਟ ਉਹਨਾ ਚਿਰ ਆਉਂਦੀ ਜਿੰਨਾ ਚਿਰ ਕੁਰਬਾਨੀ ਨੂੰ ਬੋਲਦਾ ਰਹਿੰਦਾ ਜਿੱਥੇ ਮੰਨਣ ਤੋਂ ਮੁਨਕਰ ਹੋ ਗਿਆ ਉੱਥੇ ਖੜ ਗਿਆ ਉੱਥੇ ਰੁਕ ਜਾਂਦਾ ਜੋ ਗੁਰਬਾਨੀ 'ਚ ਇਹ ਕਿਹਾ ਹੈ ਜੇ ਇਹਦੇ ਹਰ ਸਾਨੂੰ ਸਹੀ ਮਿਲ ਗਏ ਜਿੰਨਾ ਜੇ ਮੰਨਦਾ ਰਹੂਗਾ ਰੁਕਾਵਟ ਨਹੀਂ ਹੈ ਸਾਡੀ ਰੁਕਾਵਟਾਂ ਪਾਰ ਕਰਦਾ ਚਲਾ ਜਾਊਗਾ ਜਿੱਥੇ ਸ਼ਬਦਾਂ ਘੜੀ ਹੋ ਕੱਲੀ ਗੁਰਬਾਨੀ ਤੋਂ ਗੁਰਬਾਨੀ ਤੂੰ ਬੱਲੜ ਤੇ ਜਿੱਥੇ ਮੁਟਕਰ ਹੋ ਗਿਆ ਬੰਦ ਉਹ تیرਕਾਵਟ ਆ ਜਾਣੀ ਹੈ। ਹਾਂਕ ਉੱਧਰ ਹੈ ਉਧਾਰ ਹੋਊਗਾ। ਜਿਹਨਾਂ ਰਸਨ ਰਸਾਇਆ, ਜਿਨ੍ਹਾਂ ਨੂੰ ਰਸ ਆ ਗਿਆ, ਜਿਨ੍ਹਾਂ ਨੂੰ ਗਾ ਮਿੱਠਾ ਲੱਗਿਆ ਹੁਕਮ ਪਾਣਾ, ਜਿਨ੍ਹਾਂ ਨੂੰ ਪਾਣਾ ਮਿੱਠਾ ਲੱਗਿਆ ਨਾ। ਜਿਨ੍ਹਾਂ ਦੀ ਬੁੱਧ ਨੂੰ ਬੰਨੂ ਪਾਣਾ ਗੁਰਬਾਣੀ ਮਿੱਠੀ ਲੱਗੀ, ਚਾਹੇ ਗੁਰਬਾਣੀ ਢਿਡਕਦੀ ਵੀ ਹੈ, ਜੋ ਵੀ ਕਹਿੰਦੀ ਹੈ ਉਹਨਾਂ ਨੇ ਮਿੱਠਾ ਕਰਕੇ ਮੰਨ ਉਹਨਾਂ ਦਾ ਉਧਾਰ ਹੋਊਗਾ ਰੁਕਾਵਟ ਨਹੀਂ ਆ ਸਕਦੀ। ਠੀਕ ਹੈ ਜੀ ਨਾਮ ਮੰਨਿਆ ਦੁੱਖ ਭੁੱਖ ਗਈ ਜਿਨ ਨੇ ਨਾਮ ਚਿਤ ਲਾਇਆ ਨਾਮ ਮੰਨਿਆ ਦੁੱਖ ਭੁੱਖ ਗਈ ਬਾਹਰ ਬਦੁਰਾ ਦੁੱਖ ਔਰ ਭੁੱਖ ਸਾਰੀ ਮਾਇਆ ਦੀ ਭੁੱਖ ਦੋਏ ਕਿਲੇ ਕੰਦੇਲੇ ਜੇ ਨਾਮ ਚਿਤ ਲਾਇਆ ਜਿਨ੍ਹਾਂ ਨੇ ਨਾਮ ਦੇ ਨਾਲ ਚਿਤ ਲਾ ਲਿਆ ਜਿਹੜੀ ਮਨ ਜਾਂ ਪੁੱਲ ਜਾਂਦਾ ਨਾ ਮਾਇਆ ਤੋਂ ਦੇਖੋ ਇੱਥੇ ਇੰਪੋਰਟੈਂਟ ਗੱਲ ਇਹ ਹੈ ਚਿਤ ਦੇ ਤੱਤੇ ਨੂੰ ਉਕੜ ਹਾਂਜੀ ਕਹਿੰਦੀ ਹੈ ਕਿ ਇੱਕ ਵਚਨ ਹਮਮ ਇਹ ਦਾ ਮਨ ਹੈ ਚਿੱਤ ਇੱਕ। ਭਾਵ ਤੈਥੇ ਚਿੱਤ ਇਹਦਾ ਸਿੱਖ ਮੋਡੀਫਿਕੇਟ ਹੈ। ਜੇ ਚਿੱਤ ਨਹੀਂ ਹੈ ਇੱਥੇ ਹੁਣ ਜੇ ਚਿੱਤ ਖਤਮ। ਬਾਣਾ ਬੰਨੇ ਤੇ ਇੱਕ ਬਾਣੇ ਵਿੱਚ ਇਹਤ ਹੋਊਗਾ। ਦੁੱਖ ਭੁੱਖ ਜਾਊਗੀ। ਬਾਣ ਦੇ ਵਿੱਚ ਮਾਇਆ ਦੇ ਫੁਰਨੇ ਚਲੇ ਗਏਗਾ ਚਿੱਟੇ ਰਹਿ ਗਿਆ ਫਿਰ। ਨੇ ਨਾਮ ਦੇ ਮੰਮੇ ਸਿਹਾਰੀ ਨਾਮ ਵਿੱਚ ਚਿੱਤ ਲਾਇਆ। ਨਾਮ ਦੁਆਰਾ ਬੰਨੇ ਹਾਰ ਮੰਨ ਲਈ ਚਿੱਤ ਹੋ ਗਿਆ ਬਾਣ ਜਿੱਤੋ ਜਾਨਾ ਕਿ ਹਟੇ ਰੀ ਹੋ ਜਾਣਾ ਮਨ ਹਾਰ ਗਿਆ ਟਿਕ ਹੋ ਗਿਆ ਠੀਕ ਹੈ ਜੀ ਗਿਆਨ ਦੁਆਰਾ ਮਾਤੇ ਹੱਥ ਖੜੇ ਕਰਤੇ ਬਸ ਟਿਕ ਗਿਆ ਮਨ ਹਾਂਜੀ ਮਾਨਕ ਨਾਮ ਤਿਨੀ ਸਲਾਹਿਆ ਜਿਨ ਗੁਰੂ ਮਿਲਾਇਆ ਮਾਨਕ ਨਾਮ ਪਾੜੇ ਤੂੰ ਵਟਾ ਉਹਨਾਂ ਨੇ ਬੋਲੇ ਪਾਣੀ ਦੀ ਸਤਸਵਾ ਉਹਨਾਂ ਨੇ ਕੀਤੀ ਹੈ ਤਕੋ ਨਾਮ ਨੂੰ ਸੁਲਾਉਣਾ ਕਿਸੇ ਬੰਦੇ ਨੂੰ ਨਹੀਂ ਸੁਲਾਉਂਦੇ ਹੁਕਮ ਦੇ ਅੰਦਰ ਸਭ ਕੋ ਹੁਕਮ ਦੇ ਅੰਦਰ ਸਾਰੇ ਹੁਕਮ ਦੇ ਅੰਦਰ ਹੋਏ ਨੇ ਸਾਰੇ ਹੁਕਮ ਦੇ ਅੰਦਰ ਹੋਏ ਨੇ ਭਗਤਾ ਤੋਂ ਵੱਡਾ ਕੋਈ ਹੋਇਆ ਹੀ ਨਹੀਂ ਸੰਸਾਰ 'ਚ ਕੋਈ ਭਗਤਾਂ ਨਾਲ ਵੱਡਾ ਨਹੀਂ ਹੁੰਦਾ ਸੱਚਖੰਡ ਦੀ ਵੀ ਸਾਰੇ ਭਗਤਾਂ ਦੇ ਬਰਾਬਰ ਦੇ ਤੇ ਭਗਤ ਬਸੇ ਕਿ ਲੋ ਤੇ ਭਗਤੇ ਵਾਸਤੇ ਜੁਦਾ ਕੋ ਤੇ ਸਭ ਬਰਾਬਰ ਨੇ ਫਗਰ ਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ ਨਸਨ ਸਾਜ ਨਾ ਉੱਥੇ ਨਾ ਉੱਥੇ ਜੇ ਵੱਡੇ ਦਾ ਨਾਮ ਪਟਿਆ ਕੋਤਾਂ ਦਾ ਹੀ ਨਾਮ ਹੈ ਸਾਰਿਆਂ ਦਾ ਉਹਨਾਂ ਦਾ ਹੀ ਹੁਕਮ ਫੱਟ ਗਿਆ ਉਹ ਪਹਿਲਾਂ ਹੀ ਜਾਣੇ ਜੀ ਫਗਰ ਤੋਂ ਇਸ ਕਰਕੇ ਨਾਮ ਦੀ ਸਿਫਤ ਸਲਾਹਏ ਕੀ ਰੂਪ ਦੀ ਪਟਿਆਈ ਕੀਤੀ ਹੈ ਇਹਨਾਂ ਨੇ ਨਾਨਕ ਨਾਮ ਦੀ ਸਿਫਤ ਸਲਾਹਿਆ ਜਿਹੜੇ ਗੁਰੂ ਜਿਨ੍ਹਾਂ ਨੂੰ ਪੂਰਨ ਗਿਆਨ ਜਿਨ੍ਹਾਂ ਦੇ ਅੰਦਰ ਪੂਰਨ ਚਾਣਨ ਹੋ ਗਿਆ ਜਿਹਨਾਂ ਨੂੰ ਸ਼ਬਦ ਗੁਰੂ ਨੇ ਆਪਣੇ ਨਾਲ ਬੁਲਾ ਲਿਆ ਬਿਨਾਂ ਕਿਸੇ ਸੁਰਤ ਸ਼ਬਦ ਦੇ ਨਾਲ ਜੁੜ ਗਈ ਹਾਂਜੀ ਠੀਕ ਹੈ ਜੀ ਇਹ ਗੁਰੂ ਦਾ ਭਾਵ ਇੱਥੇ ਸ਼ਬਦ ਗੁਰੂ ਹੈ ਹਾਂਜੀ ਬਿਨਾਂ ਕੰਨਾਂ ਤੇ ਸੁਣ ਵਾਲਾ ਜਿਹੜਾ ਚਲਦਾ ਠੀਕ ਹੈ ਨਾਮ ਤੋਂ ਨਾਮ ਸਲਾਹ ਕੇ ਸ਼ਬਦ ਗੁਰੂ ਦੇ ਸ਼ਬਦ ਗੁਰੂ ਦੇ ਵਿੱਚ ਬਿਲਕੁਲ ਹੀ ਨਾਮ ਦੀ ਹੋ ਸਕਦੀ ਹੈ ਬੋਲੂਗਾ ਗਿਆਨ ਨਾਲ ਟਿਕਦਾ ਫਿਰ ਅੰਦਰੋਂ ਨਾਲ ਉਹ ਬਿਨਾਂ ਕੰਨਾਂ ਤੇ ਸੁਣ ਵਾਲੀ ਬਾਣੀ ਪ੍ਰਗਟ ਹੁੰਦੀ ਹੈ ਫਿਰ ਸਤਸਲਾ ਕਰਦਾ ਇਹ ਫਿਰ ਸ਼ਬਦ ਗੁਰੂ ਸਮਾ ਜਾਂਦਾ ਸ਼ਬਦ ਗੁਰੂ ਦਾ ਸਮਾ ਜਾਂਦਾ ਜਿਹਨੂੰ ਸੁਣਤੀ ਸਾਰੇ ਜਦ ਸਮਾ ਜਾਂਦਾ ਫਿਰ ਬਲਾਇਆ ਬੋਲਦਾ ਪਰ ਇਕੱਠੇ ਹੀ ਨੇ ਦੋ ਗੱਲਾਂ ਇਕੱਠੇ ਸਮਾ ਨਹੀਂ ਸਕਦਾ ਸੁਣੇ ਬਿਨਾ ਬੋਲ ਨਹੀਂ ਸਕਦਾ ਸੁਣਨਾ ਸੁਣਾਉਣਾ ਇੱਕੋ ਹੀ ਗੱਲ ਠੀਕ ਹੈ ਇਹ ਜਿਹੜਾ ਨਾਮ ਤਿਨੀ ਸਲਾਇਆ ਇਹ ਨਾਮ ਪਦਾਰਥ ਹੈ ਜੀ ਆ ਗੁਰਬਾਣੀ ਜਿਹੜੀ ਲਿਖੀ ਹੈ ਕਿ ਸਿਵ ਸਲਾਇਆ ਇਹ ਨਾਮ ਦੀ ਆਪਦਾੰਤ ਬਿੜਿਆ ਤਾਂ ਹੀ ਬੁਲਾਇਆ ਬੋਲਿਆ ਨਾ ਪਦਾਰਥ ਬਿੜਿਆ ਉਹ ਨਾ ਪਦਾਰਥ ਨੂੰ ਗੁਰੂ ਕਹਤਾ ਅੱਛਾ ਜੀ ਗੁਰੂ ਕੋਈ ਗੱਲ ਹੈ ਗਿਆਨ ਗੁਰੂ ਹੈ ਉਹ ਨੂੰ ਗਿਆਨ ਪਦਾਰਥ ਨਾਲ ਤਾਂ ਕਿਹਾ ਸੀ ਇੱਕ ਹੋਇਆ ਸੀ ਗਿਆਨ ਪਦਾਰਥ ਨਾਲ ਜੱਬਿਆਂ ਹੁਣ ਜਿਹੜਾ ਅੰਦਰੋਂ ਪ੍ਰਗਟ ਹੋਇਆ ਨਾ ਸ਼ਬਦ ਤੇ ਸੁਰਤ ਮਿਲ ਗਈ ਭਵਸਾਗਨ ਤਰੀਏ ਫਿਰ ਭਵਸਾਗਰ ਤੋਂ ਉੱਪਰ ਹੋ ਜਾਂਦੇ ਸਰਦਾ ਹੀ ਰਹਿਣਾ ਫਿਰ ਥੱਲੇ ਨਹੀਂ ਜਾਂਦਾ ਠੀਕ ਹੈ ਪਰ ਜਿਹੜਾ ਨਾਨਕ ਨਾਮ ਤੇ ਸਲਾਹਾ ਇਹ ਗੁਰਬਾਣੀ ਵਾਲਾ ਨਾਮ ਜੀ। ਆ ਗੁਰਬਾਣੀ ਵਾਲਾ ਨਾਮ ਆ ਸਲਾਇਆ ਗੁਰਬਾਣੀ ਚੋ ਲਿਖੀ ਹੈ। ਗੁਰੂ ਮਿਲਾਇਆ। ਗੁਰੂ ਜੀ ਨਾਲ ਉਹ ਗਿਆ ਪਹਿਲਾਂ ਉਹਨਾਂ ਨੇ ਨਾਮ ਦੀ ਸਿਫਲਾ ਕੀਤੀ ਹੈ। ਬਲਾਇਓ ਹੀ ਬੋਲੇ ਨੇ। ਪਹਿਲਾ ਨਾਮ ਸਮਝਣਾ ਕੀ ਗਿਆਨ ਪਦਾਰਥ ਜੀ। ਅੱਛਾ ਜੀ। ਉਹ ਗਿਆਨ ਪਦਾਰਥ ਹੈ ਨਾਮ। ਉਹ ਗੁਰਬਾਣੀ ਚੋ ਸਮਝ ਗਿਆ। ਫਿਰ ਬੰਟ ਟਿਕ ਗਿਆ ਹੋ ਕੇ ਰਿਹਾ ਬਹੁਤ ਦੇਰ ਫਿਰ ਤਾਂ ਉੱਗਿਆ ਨਾ ਇਹ ਕੋਈ ਤਾਂ ਉਗਬਾ ਹੈ ਉਹਦੇ ਬਾਦ ਗੁਰਬਾਨੀ ਵਿੱਚ ਰਚੀ ਹੈ ਮਾਂ ਮਿਲਿਆ ਤੇ ਗੁਰਬਾਨੀ ਵਿੱਚ ਤੇ ਗੁਰੂ ਨਾਮ ਪਦਾਰਥ ਹੀ ਹੈ ਜਿਹੜਾ ਜਿੰਨ ਗੁਰੂ ਮਿਲਾਇਆ ਹਾਂ ਉਹ ਚੇਤਨ ਹਾਂ ਉਹ ਨਾਮ ਪਦਾਰਥ ਠੀਕ ਹੈ ਜੀ ਨਾਮਕ ਨਾ ਮਿਲੇ ਤਾਂ ਜੀ ਕੋ ਉਹ ਮਿਲੇ ਤੇ ਇੱਕ ਗੁਰਬਾਣੀ ਵਾਲਿਆ ਗਿਆਨ ਨਾ ਤਾਂ ਮਰਿਆ ਹੋਇਆ ਮਰਦਾ ਹੈ ਉਹਦੇ ਨਾਲ ਜਿਉਦਾ ਹੁੰਦਾ ਜਿਉਨਾ ਉਹਦਾ ਫਿਰ ਬੋਲਦਾ ਗੁਰਬਾਣੀ ਰਾਜ ਹਾਂਜੀ ਇੱਥੇ ਦਸਵੀਂ ਪੌੜੀ ਦੀ ਸਮਾਪਤੀ ਹੈ